ਪ੍ਰਭੂ ਦੀ ਦ੍ਰਿਸ਼ਟੀ ਮਹਾ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋ ਪ੍ਰਭੂ ਦੇ ਦੇਸ਼ ਮਾਨ ਸੁਖ ਹੋਏ ਜਿਹੜੀ ਪ੍ਰਭੂ ਦੀ ਦ੍ਰਿਸ਼ਟੀ ਹੈ ਪ੍ਰਾਪਤਾ ਦੇਸ਼ੀ ਕੋਣ ਜਿਹੜਾ ਕੋਲੇ ਜੀ ਮਹਾ ਸੁਖ ਹੈ ਜਿਹੜਾ ਪ੍ਰਾਪਤਾ ਦੇਸ਼ੀ ਕੋਣ ਹੈ ਜੋ ਪ੍ਰਭੂ ਦਾ ਤਤਸਾਰ ਗਿਆਨ ਦਾ ਦ੍ਰਿਸ਼ਟੀ ਕੋਣ ਹੈ ਜੀ ਹੈ ਸੁਖ ਸਾਧਰ ਚ ਲੈ ਜਾਂਦਾ ਹੈ ਇਹ ਭਵ ਸਾਧਰ ਨਾਲ ਜੁੜਿਆ ਭਵ ਸਾਧਰ ਚ ਰੱਖਦਾ ਹੈ ਕੌਕੀ ਦੇਸ਼ੀ ਮਹਾਂ ਸੁਖ ਹੋਏ ਹਰ ਰਸ ਪਾਵੇ ਬਰਲਾ ਕੋਏ ਹਰ ਰਸ ਪਾਵੇ ਬਰਲਾ ਕੋਏ ਇਸ ਕਰਕੇ ਬਰਲਾ ਹੀ ਹੈ ਜਿਹੜਾ ਹਰ ਦਸ ਜੀ ਪ੍ਰਾਪਤੀ ਕਰਦਾ ਹਰ ਦਸ ਦੀ ਭੁੱਖ ਜੀ ਹੁੰਦੀ ਹੈ ਬਰਲਾ ਹੀ ਹੈ ਜਿਹਨੂੰ ਭੁੱਖਾ ਪਾਵੀ ਲੈਂਦਾ ਇਹ ਭੁੱਖਾ ਤਾਂ ਪਾਗਲ ਦਾ ਸੱਚੇ ਨਾਮ ਕੀ ਭੁੱਖ ਉਤੋਂ ਭੁੱਖ ਖਾਏ ਚੱਲੀਏ ਦੁੱਖ ਦੁੱਖ ਦਾ ਭੁੱਖ ਨਹੀਂ ਖਾਲੇ ਉਹਨੇ ਅਸਲ ਦੇ ਵਿੱਚ ਇਹ ਕਦੇ ਨਹੀਂ ਹੋਇਆ ਕਿ ਭੁੱਖ ਲੱਗੀ ਹੈ ਨਾਮ ਦੀ ਨਾਮ ਨੂੰ ਨਹੀਂ ਮਿਲਿਆ ਕਿਉਂਕਿ ਅੰਮ੍ਰਿਤ ਤਾਂ ਸਾਡੇ ਹੀ ਵਰਸਦਾ ਹੈ ਨਾਮ ਨਾਲ ਤਾਂ ਤਾਂ ਹੁੰਦਾ ਵੀ ਅੰਮ੍ਰਿਤ ਭਾਈ ਵਰਸਦਾ ਨਹੀਂ ਮਿਲਦਾ ਹੋਇਆ ਮਿਲ ਜਾਂਦਾ ਕਾਰਨ ਕੋਈ ਨਹੀਂ ਸਾ ਇਹ ਵਰਸਦਾ ਪੁੱਜੇ ਬੁੱਝਣ ਦਾ ਪਰਮਵੀਂ ਰੱਬ ਕੀ ਦੇਸ਼ ਮਹਾਂ ਸੁਖੋਏ ਹਰਸ ਪਾਵੇ ਬੱਲਾ ਕੋਏ ਬੱਲੇ ਬੱਲੇ ਹਦਸ ਹੋਦੇ ਰਹਿੰਦੇ ਨੇ ਹਰ ਜੁਗ ਜੁਗ ਭਗਤ ਵਾਹਿਗੁਰੂ ਇਹ ਨਹੀਂ ਕਿ ਕਹਾਣੂ ਪੈਦਾ ਨਹੀਂ ਹੋਣੇ ਬੰਦ ਹੋ ਜਾਣਗੇ ਜਿਹੜੇ ਬੰਦ ਕਹਿੰਦੇ ਨੇ ਉਹ ਮੀੜੇ ਦੇ ਮਸੰਦ ਨੇ ਜਿਨ ਚਾਖਿਆ ਉਸੇ ਜਨ ਤ੍ਰਿਪਤਾਂ ਦੇ ਨੇ ਚਾਖਿਆ ਉਹ ਜਨ ਤ੍ਰਿਪਤ ਹੋ ਜਾਂਦੇ ਨੇ ਤਣੇ ਕੋਈ ਤ੍ਰਿਪਤ ਹੋਇਆ ਨਹੀਂ ਕੋਈ ਤਕੀ ਸੁਣਿਆ ਇਹਨਾਂ ਨੇ ਗੁਰਦਾਰੀਆਂ 12 ਜੋ ਕੋਈ ਤ੍ਰਿਪਤ ਹੋ ਕੇ ਦਿਖਾਵੇ ਗੁਰਦਾਰੇ ਇੰਨਾ ਚਿਰ ਦੇ ਕਰਦੇ ਨੇ ਕੋਈ ਤ੍ਰਿਪਤ ਹੋਇਆ ਕਿਉਂ ਨਹੀਂ ਹੋਇਆ ਉੱਥੇ ਉਹ ਚੀਜ਼ ਨਹੀਂ ਹੈ ਚਖਣ ਨੂੰ ਜਿਹੜੀ ਕਿ ਜਿਦ ਚੱਖਿਆ ਜੇ ਜੰਤ੍ਰ ਤ੍ਰਿਪਤਾਨੇ ਜਿਨ੍ਹਾਂ ਚੱਖਿਆ ਤ੍ਰਿਪਤ ਹੋ ਗਏ ਉਹ ਤ੍ਰਿਪਤਾਨੇ ਜਿਨ੍ਹਾਂ ਹਰਖ ਚੱਖਿਆ ਇਹਦਾ ਮਤਲਬ ਆ ਰੜਕੇ ਨਹੀਂ ਜਾਂਦਾ ਇਹਦਾ ਬਲੋਪਣਾ ਨਹੀਂ ਬੰਦ ਕਰਤਾ ਹਰਖਾ ਬਲੋਪਣਾ ਨਹੀਂ ਬੰਦ ਹੋਇਆ ਹੋਇਆ ਜੇ ਹਰਖਾ ਬਲੋਪਣਾ ਕੋਈ ਬਲੂਨ ਜੇ ਸੱਚੇ ਬਲਉਂਦੇ ਤਾਂ ਤਤ ਪ੍ਰਾਪਤ ਹੋ ਜਾਂਦਾ ਸੱਚੇ ਬੁਲਾਇਆ ਨਹੀਂ ਕੇ ਸਦੂ ਮਿਲਿਆ ਨਹੀਂ ਸਿਰਫ ਤੋਹਿਆ ਜੀ ਸਿਰਫ ਤੋਹਿਆ ਜੀ ਸਿਰਫ ਤਾਂ ਕਾਦੇ ਨਾ ਹੋ ਜਾਂਦਾ ਬੁਲਾਉਣ ਦਾ ਕੋਈ ਦਿੰਦਾ ਹੀ ਨਹੀਂ ਅਖਰੀ ਅਰਥ ਕਰਕੇ ਪਾਸੇ ਹੁੰਦੇ ਨੇ ਉਹ ਤਾਂ ਕਹਿੰਦੇ ਨੇ ਕਿਸੇ ਨੂੰ ਪਤਾ ਬਣਾ ਲੱਗ ਜੇ ਵੀ ਇਹ ਤੇ ਹੈ ਭੁਖਣ ਤੇ ਰੌਲਾ ਨਾ ਪੈ ਜਾ ਵੀ ਕਾਦੇ ਨਹੀਂ ਬੁਲਾਉਂਦੇ ਤੁਸੀਂ ਕਿਸੇ ਨੂੰ ਟੇਸ ਨਾ ਆ ਜਾਵੇਦਾ ਇਹ ਤਾਂ ਆਪ ਡਰੇ ਹੋਏ ਨੇ ਕੁਝ ਕੁ ਤੇ ਬਗਾਵਤ ਨਾ ਪੈਦਾ ਹੋ ਜਾਏ ਵੀ ਜਿਹੜਾ ਕੁਛ ਹੈ ਤੇ ਅਸਲੀ ਚੀਜ਼ ਆ ਉਹਦਾ ਤੁਸੀਂ ਲੁਕੋਈ ਬੈਠੇ ਹੋ ਜਿਹੜੇ ਰੌਲਾ ਬੋਲਦੇ ਨੇ ਲੁਕੋਈ ਬੈਠੇ ਹੋ ਚਾਹੁੰਦੇ ਉਹ ਵੀ ਨਹੀਂ ਰੌਲਾ ਬੋਲਦੇ ਨੇ ਰਬਲੇ ਆਂਦੇ ਵਿੱਚ ਫਲਾਨਿਆਂ ਦੇ ਵਿੱਚ ਲਪੇਟ ਕੇ ਰੱਖਦੇ ਹੋ ਆ ਸਾਢੇ ਸਾਲ ਦਾ ਪੈਂਦਾ ਇਹ ਇਹ ਇਹ ਦੇ ਵਾਸਤੇ ਸੁੱਤੇ ਪੈਦੇ ਹੋ ਚਾਹੁੰਦੇ ਉਹ ਵੀ ਨਹੀਂ ਰੌਲਾ ਹੀ ਬੋਲਦੇ ਨੇ ਉਹਨਾਂ ਦੇ ਖਿਲਾਫ ਉਹ ਤਾਂ ਘੋਲ ਰੌਲਾ ਪਾ ਕੇ ਘੋਲ ਖੜ ਜਉਦੇ ਨੇ ਇਹਨਾਂ ਦੇ ਬਲਕੇ ਇਹਨਾਂ ਨੂੰ ਵੀ ਭੇੜੇ ਨੇ ਰੌਲਾ ਪਾਉਣ ਵਾਲੇ ਜਿਹੜੇ ਰੌਲਾ ਪਾਉਂਦੇ ਰਮਾਲੇ ਨੇ ਬੈਠ ਕੇ ਰਹਦੇ ਉਹ ਇਹਨਾਂ ਨੂੰ ਵੀ ਬੈਠੇ ਨੇ ਉਹਨਾਂ ਦੇ ਪ੍ਰਭਾਵ ਜਿੱਤਾ ਇਹ ਡੁੱਬੇ ਰਹੇ ਇਹਨਾਂ ਨੂੰ ਡਬਾਉਣੇ ਵਾਲੇ ਉਹ ਨੇੜੇ ਰਮਾਲੇ ਰੌਲਾ ਪਾਉਂਦੇ ਨੇ ਰਮਾਲੇ ਦਾ ਉੱਥੇ ਬੈਠੇ ਬੈਠ ਆਪ ਉਹਨਾਂ ਦੇ ਪ੍ਰਭਾਵ ਲੈ ਕੇ ਡਬੋਏ ਨੇ ਉਹਨਾਂ ਦੀ ਸੰਗਤ ਇਹ ਡਬੋਏ ਜੀ ਮਾਇਆ ਦੀ ਟੱਟ ਕੋ ਨਾਲ ਨਹੀਂ ਲਾਈ ਜਾਨਾਂ ਉਹ ਰੌਣਾ ਪਾਉਂਦੇ ਟਰ ਉਹ ਚੌਧਰ ਚੁਲਦੀ ਰਹੀ ਚੌਧਰ ਕਰਕੇ ਸੀ ਉਹ ਹੁਣ ਚੌਧਰ ਨਹੀਂ ਚੁਲਦੀ ਰਹੀ ਜਿਨ ਚਾਖਿਆ ਸੇ ਜੰਮ ਤਿਰਪਾਨੇ ਪੂਰਨ ਪੁਰਖ ਨਹੀਂ ਡੋਲਾਨੇ ਜਿਨ ਚਾਖਿਆ ਸੇ ਜੰਮ ਤਿਰਪਾਨੇ ਪੂਰਨ ਪੁਰਖ ਪੂਰ ਪੁਰਖ ਹੋ ਗਏ ਪੂਰ ਬ੍ਰਹਮ ਹੋ ਗਏ ਹੋ ਪੂਰ ਪੂਰਨਤਾ ਆ ਗਈ ਉਹਨਾਂ ਨੂੰ ਬੈਲੋ ਲਾਨੇ ਸਭ ਪੂਰਾ ਹੋ ਜਾਂਦਾ ਫਿਰ ਭਰਿਆ ਹੋਏ ਤਾਂ ਕਹੂ ਨਾ ਢੁੱਲ ਕਾਇ ਕਬੀਰ ਛੂਛਾ ਕਟ ਬੋਲਦਾ ਛੂਛਾ ਜ ਹੈ ਨਾ ਛੂਛਾ ਜਿਹੜੇ ਜਿਆਦਾ ਬੋਲਦੇ ਨੇ ਛੂਛੇ ਨੇ ਛੂਛੇ ਕੜੇ ਨੇ ਕਬੀਰ ਛੂਛਾ ਘੱਟ ਬੋਲ ਭਰਿਆ ਹੋਏ ਨਾ ਕਹੂ ਢੁੱਲ ਪੜਿਆ ਹੋਇਆ ਦੇਖੋ ਪੜਿਆ ਹੋਇਆ ਨਾ ਕਬੂ ਬੋਲੇ ਨਹੀਂ ਲਗਿਆ ਢੋਲੇ ਨਹੀਂ ਬੋਲਦਾ ਤਾਂ ਢੋਲਦਾ ਨਹੀਂ ਜੇ ਬੋਲਦਾ ਤਾਂ ਢੋਲਦਾ ਨਹੀਂ ਹੈ ਢੋਲਦਾ ਪੈ ਹੋ ਕੇ ਬੋਲਦਾ ਢੋਲਦਾ ਉਹ ਹੈ ਜਿਹੜਾ ਪੈਸ ਬੋਲਦਾ ਦਰਦਾ ਵੀ ਹੈ ਬੋਲਦਾ ਵੀ ਉਹ ਢੋਲਦਾ ਸੱਚ ਬੋਲਣ ਲੱਗਿਆ ਵੀ ਢੋਲਦਾ ਸੱਚ ਦਾ ਪਤਾ ਲੱਗ ਗਿਆ ਜਦੋਂ ਤਬੁੱਲਾ ਢੋਲ ਗਿਆ ਢਰ ਗਿਆ ਕਹਿੰਦਾ ਇੱਕ ਬਾਜਵੇਂ ਸ਼ਰਤ ਅਦਬ ਦੀ ਹੈ ਹਰ ਹਰ ਵਿੱਚ ਸੂਰਤ ਰੱਬ ਦੀ ਹੈ ਕਿ ਆਖਾਂ ਇਸ ਇਸਰਾਰ ਦਾ ਨਹੀਂ ਤਾਂ ਯਾਰ ਗਿਆ ਚੁੱਪ ਇੱਥੇ ਗੁਪਤੀ ਬਾਤ ਸੁਖੇਦੀ ਆ ਕਹਿੰਦਾ ਸੁਖੇ ਇਸ ਗੱਲ ਚੁੱਪ ਕਰ ਜੋ ਸਾਥੀ ਨੂੰ ਦੱਸੋ ਨਾ ਕਹਿੰਦਾ ਨੂੰ ਗੁਪਤੇ ਰੱਖੋ ਇੱਥੇ ਢੋਲ ਗਿਆ ਪਰਿਆ ਹੋਏ ਨਾ ਕਬੂ ਢੋਲੇ ਢੋਲ ਬੋਲ ਨਹੀਂ ਲਿਖਿਆ ਹੋਇਆ ਉਥੇ ਬੋਲੇ ਆ ਤੇ ਢੋਲੇ ਆ ਲਫ਼ਜ਼ ਵੜਿਆ ਆ ਬੋਲੀ ਛੂਛਾ ਢੋਲਦਾ ਜੇ ਉਹ ਢੋਲਦਾ ਆ ਜਾਂ ਬੋਲਦਾ ਆ ਉਹਦਾ ਬੋਲਣਾ ਹੀ ਢੋਲਣਾ ਹੈ ਉਹਦਾ ਬੋਲਣਾ ਹੀ ਢੋਲਣਾ ਜਦ ਬੋਲਦਾ ਤਾਂ ਢੋਲਦਾ ਨਾਲ ਕੀ ਢੋਲਦਾ ਵਾਇਆ ਛੱਡਣ ਤੋਂ ਢੋਲਦਾ ਮਰਨ ਤੋਂ ਡਰਦਾ बहुत ਕਬੂਲਦਾਨੀ ਦੇਖਦਾ देखता ਅੱਜ ਜੇ ਮੈਂ ਗੱਲ गल कहती ਆਦਮੀ आदमी ਹੋ हो जूगा। जा रहा ਜੂਗੀ ਸਖਤ ਤੇ ਗੱਲ ਉਠਦੀ ਕਹਿਣੀ ਕਰਦੇ ਨਰਾਜ ਹੋ ਜਾਣਗੇ ਉਹ ਢੋਲਦਾ ਦਰਹਲ ਪਾਇਆ ਪਰੇ ਸੁਪ ਉਰ ਪਰੇ ਪ੍ਰੇਮ ਰਸ ਰੰਗ ਉਗ ਜੇ ਚਾਉ ਸਾਧ ਕੇ ਉੱਪਰ ਭਰੇ ਫੁੱਲ ਭਰ ਗਏ ਉੱਪਰ ਭਰੇ ਆ ਦੇਖ ਲੈ ਭਰਿਆ ਹੋਏ ਸੁਭਾਰ ਭਰਿਆ ਹੋਏ ਉਹ ਭਰਿਆ ਹੀ ਆ ਰਸ ਦੇ ਨਾਲ ਔਰ ਪ੍ਰੇਮ ਦੇ ਰੰਗ ਨਾਲ ਫੁੱਲ ਭਰ ਗਏ ਫੁੱਲ ਕੋਈ ਇੱਕ ਮਸ ਜਿੱਦਾਂ ਰੱਤੀ ਜਿੱਦਾਂ ਵੀ ਕਵੀ ਨਹੀਂ ਹੈ ਪਰ ਪ੍ਰੇਮ ਰਸ ਰੰਗ ਉਪਜੇ ਚਾਹੋ ਸਾਧਕੇ ਸੰਗ ਉਪਜੇ ਚਾਹੋ ਸਾਧਕੇ ਸੰਗ ਸਾਧਕੇ ਹੁਣ ਸੰਗੀ ਸਾਧਕੇ ਸੰਗੀ ਹਾਂ ਜਦੋਂ ਉਹਨਾਂ ਸਾਜਾਂ ਦਾ ਫੇਰ ਇਹਨੂੰ ਪੀੜ ਤੇ ਹਟਦਾ ਹੀ ਨਹੀਂ ਕੋਨਾ ਜਰਮ ਨਹੀਂ ਇਹ ਸੱਚ ਨੂੰ ਸੱਤੇ ਰਸ ਨੂੰ ਅੰਦਰ ਜਾਣ ਦਿੰਦਾ ਜਿੰਨਾ ਜਰਮ ਸਾਧਿਆ ਦੀ ਹੋਇਆ ਜਿੰਨਾ ਜਰਮ ਢੋਲਦਾ ਹੈ ਜਿੰਨਾ ਜਰਮਾਂ ਢੋਲਦਾ ਜਿੰਨਾ ਜਰਮਾਂ ਢੋਲਦਾ ਓਨਾ ਚਿਰੋ ਹੋ ਆਪਣੇ ਹਿਸਾਬ ਦਾ ਹੀ ਪੀਂਦਾ ਜਿਆਦਾ ਨਹੀਂ ਪੀਂਦਾ ਜਦੋਂ ਮਨ ਸਾਧਿਆ ਜਾਂਦਾ ਜਦੋਂ ਮਨ ਸਾਧ ਜਾਂਦਾ ਫਿਰ ਇਹ ਬੇਸਬਰਿਆਂ ਵਾਂਗੂ ਪੀਂਦਾ ਫਿਰ ਰੱਜਦਾ ਹੀ ਨਹੀਂ ਫੇਰ ਜੀ ਇਹਨੂੰ ਸਬਰ ਪੀਣ ਚ। ਜੇ ਸਬਰ ਆ ਗਿਆ ਫੇਰ ਸਬਰ ਖਤਮ। ਸੱਚ ਦਾ ਸਬਰ ਨਹੀਂ ਹੋਣਾ ਚਾਹੀਦਾ ਸਬਰ ਝੂਠ ਹੋਣਾ ਚਾਹੀਦਾ। ਸੰਤੋਖ ਜੇ ਸੱਚ ਦਾ ਜਦੋਂ ਆ ਗਿਆ ਨਾ ਉੱਥੇ ਤੇਰੀ। ਸੱਚ ਬਲੋਂ ਨਹੀਂ ਸੰਤੋਖ ਜਾਂਦਾ। ਮਾਇਆ ਬਲੋਂ ਸੰਤੋਖ ਜਾਂਦਾ। ਜਦੋਂ ਸਾਡਾ ਵੀ ਸੰਤੋਖ ਆ ਗਿਆ ਉਦੋਂ ਸੱਚ ਨੂੰ ਛੱਡ ਦੂਗਾ। ਉਦੋਂ ਦੀਦ ਆ ਜੂਗੀ ਇਹਨੂੰ ਫੇਰ ਸਪਨਾ ਕਹੇ ਸ਼ੁਰੂ ਹੋ ਜਾਊਗਾ ਉਹਨੂੰ ਦਾ ਹਰ ਵਿਸਰਜੂਗਾ ਜਸਨ ਤੋਂ ਹੋ ਗਿਆ ਹਰ ਵਿਸਰਜੂ ਹਾਂਜੀ ਪਰੇ ਸ਼ਰਨ ਆਨ ਸਭ ਤਿਆਗ ਅੰਤਰ ਪ੍ਰਕਾਸ਼ ਅੰਦਰ ਦੇ ਬਿਲਾਗ ਪਰੇ ਸ਼ਰਨ ਸ਼ਰਨ ਛਲ ਪੈ ਆਨ ਸਭ ਤਿਆਗ ਆਨ ਸਭ ਕੀ ਤਿਆਗਿਆ ਸਭ ਕੀ ਤਿਆਗ ਫਿਰ ਤੇ ਫਿਰ ਉਹ ਜਿਹੜੂ ਫਿਰਦਾ ਤੁਰਦਾ ਆ ਉਹ ਤਿਆਗ ਤੇ ਭੁੱਲ ਗਿਆ ਸਾਰੇ ਸਵੇਰ ਸਵੇਰ ਆਹੋ ਜਿੰਨਾ ਹੋਰ ਮਤਾਂ ਜੋ ਛੱਡ ਸੀ ਚਾਹੇ ਮਾਇਆ ਦੇ ਜੋ ਵੀ ਛੱਡ ਕੇ ਆਇਆ ਉਹ ਤਿਆਗ ਤੇ ਹੁਣ ਪਹਿਲਾਂ ਤਾਂ ਫਿਰਤ ਫਿਰਤਾ ਤਾਂ ਤਿਆਗੇ ਨਹੀਂ ਸੀ ਪਹਿਲਾਂ ਫਿਰਫਿਰਤਾ ਆ ਤਾ ਨਹੀਂ ਸੀ ਜਦ ਪ੍ਰੇਮ ਰਸ ਰੰਗ ਨਾ ਭਰ ਗਿਆ ਫੇਰ ਤਿਆਗੇ ਰਏ क्या ਗੱਲ ਨਹੀਂ ਵਾਤਾ ਦੇਖੋ ਨਾ ਸੁਪਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ ਉਪਜੇ ਚਾਉ ਸਾਧ ਕੇ ਸੰਗ ਹੁਣ ਹੋਰ ਪੀੜ ਨੂੰ ਵੀ ਚਾਉ ਬਣਿਆ ਰਹਿੰਦਾ ਹੋਰ ਬਾਣੀ ਸੁਣਨ ਨੂੰ ਹੋਰ ਜਾਣ ਲੈਣ ਨੂੰ ਚਾਉ ਬੜਿਆ ਹੀ ਰਹਿੰਦਾ ਸਬਰ ਜਿੱਥੇ ਜਿਹੜੀ ਟੁੱਟੀ ਤੋਂ ਇਹ ਰਾਸ ਆਉਂਦਾ ਏ ਉਹ ਟੁੱਟੀ ਦੀ ਛੱਡ ਕੇ ਜਾਂਦਾ ਵੀ ਜ਼ਿਆਦਾ ਉਹ ਯਾਸ ਹੈ। ਪਰੇ ਸ਼ਾਮ ਨੂੰ ਆਨ ਸੰਤਿਆਗ ਅੰਤਰ ਪ੍ਰਗਾਸ ਆਉਂਦੇ ਨੇ ਨਿਵਲਾਗ। ਹਨੇਰ ਅਸੀਂ ਤਾਂ ਸਭ ਕੁਝ ਤਿਆਗ ਕੇ। ਸੰਸਾਰ ਦੀ ਚਿੰਤਾ ਫਿਰ ਸਭ ਤਿਆਗ ਕੇ। ਬੋ ਮਾਇਆ ਸਭ ਤਿਆਗ ਕੇ। ਸ਼ਰਨ ਆ ਕੇ ਕਰਦੇ ਹਮ ਦੀ ਪਰੇਸ਼ਾਨੋ ਆਨ ਸਮਝਾਗ ਸਭ ਤਿਆਗਤਾ ਸੰਸਾਰ ਦੀ ਚਿੰਤਾ ਫੇਗ ਸ਼ਰਨ ਆ ਕੇ ਹੁਕਮ ਦੀ ਸ਼ਰਨ ਆ ਕੇ ਪਾਣੇ ਚ ਆ ਕੇ ਸਭ ਕੁਝ ਤਿਆਗ ਕੇ ਪਾਣੇ ਜਾਗੇ ਜੋ ਹੁੰਦਾ ਹੁਣਦੇ ਆ ਪਾਣੇ ਚ ਨੇ ਸੋਈ ਅੰਤਰ ਪ੍ਰਗਾਸ ਅੰਦਰ ਪ੍ਰਗਟਾਸ਼ ਹੈ ਹੁਣ ਉੱਤਰ ਪ੍ਰਗਟਾਸ਼ ਹਰ ਦਿਨ ਅੰਦਰ ਪੂਰਾ ਚਾਨਣ ਪ੍ਰਗਾਸ਼ ਜਿਆਦਾ ਹੈ ਜਾਂ ਪੂਰਾ ਚਾਨਣ ਹੋਵੇ ਕਿਸੇ ਖੁਜੇ ਵੀ ਕੋਈ ਕਿਸੇ ਕਿਸਮ ਦੀ ਸ਼ੰਕਾ ਨਾ ਹੋਵੇ ਹਿਰਦੇ ਵਿੱਚ ਉਹ ਪ੍ਰਗਾਸ਼ ਹੈ ਬ੍ਰਿਮ ਗਿਆਨੀ ਕਾ ਮਨ ਪ੍ਰਗਾਸ਼ ਜੈਸਾ ਤਾਰ ਉਪਰ ਅਕਾਸ਼ ਏਕ-ਇਕ ਗੱਲ ਪ੍ਰਕਾਸ਼ ਕਰਦੀ ਹੈ ਜਿਹੜੀ ਇਥੇ ਗੱਲ ਪ੍ਰਕਾਸ਼ ਕਰਦੀ ਹੈ ਜੇ ਬੱਤੀਆਂ ਸਾਰੀਆਂ ਜਗ ਭਣ ਇਕੱਠੀਆਂ ਤਵੇ ਪ੍ਰਕਾਸ਼ ਹੋ ਜਾਂਦਾ ਸਾਰੀਆਂ ਇਹ ਬੱਤੀਆਂ ਇਕੱਠੀਆਂ ਜਗ ਭਣ ਤੇ ਇੱਕ ਇੱਕ ਬੱਤੀ ਜਿਗੋਂ ਦੇਦ ਨੂੰ ਪ੍ਰਕਾਸ਼ ਹੁੰਦਾ ਜਿਹੜੇ ਗੁੰਝਾ ਜਿਹੜੀ ਬੱਤੀ ਹੈ ਉਹ ਉੱਥੇ ਹੀ ਚੱਲਣ ਕਰਦੀ ਹੈ ਉਹ ਬਹੁਤ ਵੱਡੇ ਹਾਲ ਦੇ ਵਿੱਚ ਇੱਕ ਬੱਤੀ ਲੱਗੀ ਐ ਛੇ ਛੋਟੀਆਂ ਜਿੱਤੇ ਬੱਤੀ ਆਨ ਹੋ ਜਾਂਦੀ ਹੈ ਉੱਥੇ ਜਨਨ ਹੋ ਜਾਂਦਾ ਪਰ ਆ ਜਦੋਂ ਨਾਲ ਜੋ ਸਾਰੀਆਂ ਬੱਤੀਆਂ ਜਗ ਗਈਆਂ ਕਿਤੇ ਨਹੀਂ ਰਹਿ ਗਈ ਦੀ ਫਿਰ ਆਣਦੇ ਨਾਲ ਲਿਬ ਲਾ ਗਈ ਜਲ ਪ੍ਰਕਾਸ਼ ਕਿਵੇਂ ਹੋਇਆ ਅੱਪਾ ਆਪਣੀ ਮਰਜ਼ੀ ਨਾਲ ਇੱਕ ਇੱਕ ਬੱਤੀ ਉਹ ਜਗਾ ਸਕਦੇ ਆ ਆਪਣੀ ਕੋਸ਼ਿਸ਼ ਨਾਲ ਇੱਕ ਜਗਾ ਲਈ ਦੋ ਜਗਾ ਲਈ ਜੇ ਤੇਰੇ ਹੱਥ ਜਾਂਦਾ ਉੱਥੇ ਤੇ ਜਗਾਵੇਂਗੇ ਪਰ ਜਦ ਛਾਲਣ ਆਏ ਉਹਨੇ ਸਾਰੀ ਉਸ ਵਿੱਚ ਉਸ ਵਿੱਚ सारिया ਇਕੱਠੀਆਂ ਜਗਾਉਂ ਤੀਆਂ ਡਾਇਰੈਕਟਰ ਜਿਹੜੀ ਡਾਇਰੈਕਟ ਸੋਚ ਸੀ ਨਾ ਸਾਰਿਆਂ ਦੀ ਕੋਈ ਸਾਰੀਆਂ ਬਕੀ ਦੀ ਡਾਇਰੈਕਟ ਸੋਚ ਹੈ ਉਹੀ ਚ ਆਨ ਕਰਦੀ ਕਿ ਇਹ ਰਿਮੋਟ ਨਾਲ ਸਾਰੀਆਂ ਸੋਚਾਂ ਆਨ ਕਰਦੀ ਹਾਂ ਰਿਮੋਟ ਉਹਦੇ ਕੋਲ ਸੀ ਉਹਦੇ ਨਾਲ ਕਿੰਨਾ ਚੰਨ ਹੋ ਗਿਆ ਬ੍ਰਹਮ ਗਿਆਨੀ ਕਾ ਮਨ ਪ੍ਰਗਾਸ ਜੈਸੇ ਤਾਰੂਪਰੋਕਾਸ ਤਾਂ ਪ੍ਰਗਾਸ ਹੋਇਆ ਅੰਦਰ ਨੂੰ ਲਿਵ ਲੱਗ ਫਿਰ ਤਾਂ ਪਤਾ ਹੀ ਲੱਗ ਗਿਆ ਸਾਰਾ ਵੀ ਹੁਕਮ ਨਾਲੇ ਸਭ ਕੁਝ ਹੋ ਰਿਹਾ ਸਾਰਾ ਹੀ ਦਿਖ ਪਿਆ ਕਿੰਨੇ ਲੋਕ ਦਿਖ ਪਏ ਫਿਰ ਚ ਲਗਾ ਦੇ ਸੀ ਫਿਰ ਸਭ ਕੁਝ ਤਿਆਗਤਾ ਭਜਣਾ ਰਛਾ ਅੰਦਰ ਨਾਲ ਅੰਦਰ ਲਿਵ ਲੱਗ ਗਈ जो ਹੁੰਦਾ ਉਹ ਆਪਣਾ ਹੋ ਹੀ ਜਾਂਦਾ ਜਿਹੜੇ ਰੋਗ ਭੱਜੇ ਨਾ ਠੇ ਫਿਰਦੇ ਨਾ ਐਵੇਂ ਹੀ ਫਿਰਦੇ ਨੇ ਬੇਮਤਲਬ ਕੁਝ ਨੇ ਫਰਕ ਪੈਂਦਾ ਜਿਵੇਂ ਥੋੜਾ ਜਿਹਾ ਵੀ ਪੈਣ ਲੱਗ ਜਾਣਾ ਕੀੜੀਆਂ ਭਜ ਲੈਂਦੀਆਂ ਸਲਾਵ ਆ ਜੇ ਆਪਣੇ ਅੰਦਰ ਅੰਦਰ ਜਿਹੜਾ ਹੁੰਦਾ ਹੈ ਕੀੜੀਆਂ ਨਹੀਂ ਦੀ ਉੱਥੇ ਬੜਾ ਫਬਰਦਾ ਫੜ ਪੈਦਾ ਹੋ ਜਾਂਦੀ ਹੈ ਉਹਨੂੰ ਪੇਪੜਾ ਨੂਰ ਫਾਇਦਾ ਰਹਿੰਦਾ ਵੀ ਪਤਾ ਨਹੀਂ ਕੀ ਹੋ ਜੂ। ਥੋੜੇ ਜਿਹਾ ਪਚਾਲ ਆਉਂਦਾ ਇਹਨੇ ਚੱਲ ਜਾਂਦੀ ਏ ਸਾਰੇ। ਵੀ ਪਤਾ ਨਹੀਂ ਕੀ ਹੋਣ ਵਾਲਾ। ਜੋ ਹੋਣ ਵਾਲਾ ਹੋ ਜੂਗਾ। ਜੋ ਹੋਣ ਵਾਲਾ ਹੋ ਉਹ ਕਹਿੰਦੇ ਨੇ ਕਿਤੇ ਪਚਾਲ ਆਇਆ। ਉਹ ਦੋ ਬੰਦੇ ਭੱਜ ਕੇ ਬੀ ਚਲੇ ਗਏ। ਉੱਚਵਾਰਾ ਡੇਕੋਂ ਸੁਬ ਮਰ ਗਏ, ਘਰ ਵਾਲੇ ਬਚ ਗਏ। ਕਹ ਰਾਲੇ ਵੱਜ ਗਿਆ ਜਿਹੜਾ ਘਰੋਂ ਬਾਹਰ ਪੱਜ ਗਿਆ ਵੜ ਕੇ ਥੱਲੇ ਚਬਾਰਾ ਡਿੱਪੇ ਗੋਲਡੀ ਆਦਾ ਆਪਣਾ ਘਰ ਲੈ ਗਿਆ ਦੀ ਤਾਂ ਕੋਣ ਲੈ ਗਿਆ ਉੱਥੇ ਕੀ ਬਤ ਜਦੋਂ ਇਹ ਸੋਚਦਾ ਫੇਰ ਉਹ ਕਹਿੰਦਾ ਵੀ ਜੇ ਉਹ ਨਾ ਬਚਾਉਣਾ ਇੱਥੇ ਬਚਾ ਦੇਣਾ ਆਪਣੀ ਅਕਲ ਮਰਵਾ ਸਕਦੀ ਹੈ ਬਚਾ ਨਹੀਂ ਸਕਦੀ ਪਰਮੇਸ਼ਾ ਦੀ ਅਕਲ ਬਚਾ ਸਕਦੀ ਹੈ जे शरण चले जाइए आम सब त्याग परेशान आन त्याग अपनी एफर्ट त्यागती अपनी भरची त्यागती ज्यों न पाले राग पविवर शरण आ गए हां बडभागी जपिया प्रभु सोए बडभागी जपिया प्रभु सोए होड़ चैन जप शुरू होया बडभागी जपिया प्रभु सोए पहला जब होया ईदी ਬਾੜਾ ਲੈ ਲਈ ਧਿਆਨ ਕਿਤੇ ਮਾੜਾ ਹੱਥ ਤੇ ਤੇ ਜਬਿਆ ਰਹੀ ਦੀ ਜਬ ਤਾਂ ਹੋਈ ਨਹੀਂ ਰਿਆ ਕੁਰਬਾਨੀ ਬੜਦਾ ਧਿਆਨ ਕਿਤੇ ਜਬ ਤਾਂ ਹੋਈ ਨਹੀਂ ਰਿਆ ਵਿਚਾਰ ਨਹੀਂ ਕਰ ਸਕਦਾ ਬਿਨਾ ਚਿੰਤਾ ਰਹਿਤ ਹੋਏ ਤੇ ਗੁਰਬਾਣੀ ਦੀ ਜਿੰਨਾ ਜੜ ਕੇ ਤੇ ਹੋਰ ਸੋਪਟ ਜੁੜੀ ਹੋਈ ਆ ਤੇ ਗੁਰਬਾਣੀ ਨਹੀਂ ਵਿਚਾਰੀ ਜਾ ਸਕਦੀ ਜਬ ਗੁਰਬਾਣੀ ਵਿਚਾਰਨਾ ਹੀ ਜਬ ਗੁਰਬਾਣੀ ਨੂੰ ਸਮਝਣ ਬਾਅਦ ਤੇ ਸਾਰੇ ਪਾਸਿਆਂ ਤੇ ਸੁੱਤ ਨੂੰ ਤੋੜ ਕੇ ਉੱਥੇ ਰੱਖਣਾ ਉਹ ਇੱਕੋ ਪੰਡ ਤੇ ਗੁਰਬਾਣੀ ਕੀ ਕਹਿੰਦੀ ਹੈ ਬੇਫਿਕਰ ਹੋ ਕੇ ਜੇ ਨਾ ਜਲਦੀ ਬਾਣੀ ਵਿਚਾਰਦੇ ਉਹਨੂੰ ਗੁਰਬਾਣੀ ਦਾ ਸਮਝ ਨਹੀਂ ਆ ਸਕਦੀ ਕਿਸੇ ਨੂੰ ਆਈਓਰੀ ਇਸ ਕਰ ਹਾਂਜੀ ਨਾਨਕ ਨਾਮ ਰਤੇ ਸੁਖ ਹੋਏ ਨਾਨਕਾ ਨਾਮ ਰਤੇ ਸੁਖ ਹੋਏ ਕਹਿੰਦੇ ਫਿਰ ਜਦ ਜਪਿਆ ਬੜੇ ਭਾਕਾਂ ਨਾਲ ਉਦੋਂ ਨਾਬਦਾ ਰੰਗ ਜਾਣ ਲੱਗ ਗਿਆ ਤੇ ਰਸੂ ਖੋਣ ਲੱਗ ਗਿਆ ਜਾਇ ਜੇ ਬੇਲਣਾ ਟਾਈਟ ਕੀਤਾ ਫਿਰ ਗੰਨਾ ਦਿੱਤਾ ਫਿਰ ਰਸ ਆਉਣ ਲੱਗਿਆ ਉਹ ਬੇਲਣਾ ਦਾ ਖੁੱਲਾ ਸੀ ਤੇ ਗੰਨਾ ਸਾਹ ਤੇ ਦਾ ਸਾਹ ਦਾ ਪਰਲੇ ਪਾਸਾ ਜਾਂਦਾ ਸੀ ਤੇ ਉਹ ਤਾਂ ਫਿਰ ਕੋਸਤਾ ਨਿਕਲਦਾ ਤਾਂ ਹੀ ਨਹੀਂ ਸੀ ਜਾਇ ਜਾਇ ਤਾਂ ਦੀ ਪਾਇਓ ਜੇ ਪਰਲੇ ਪਾਸੇ ਨਿਕਲ ਗਿਆ ਥਲੇ ਜੋ ਰੱਖਿਆ ਪਾਂਡੋ ਖੱਲੀ ਉਹ ਤੇ ਰਸ ਹੁੰਦਾ ਹੀ ਨਹੀਂ ਹੈ ਜਾ ਕੁਛ ਕਰਦੇ ਨੇ ਜਿਹੜੇ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹਦਾ ਹੈ ਜਾ ਉਹ ਚੱਲਦਾ ਤੋਤੇ ਮਿਲਣਾ ਕੀ ਸੀ ਬੜੇ ਭਾਗੀ ਜਿਵੇਂ ਆਪਰੰਥ ਹੋਏ ਜਿਵੇਂ ਆਪਰੰਥ ਹੋਏ ਨਾਮ ਦਾ ਨਾਮ ਨਾਮ ਮਿਲਿਆ ਜਾਦੋ ਛੁੱਟ ਗਿਆ ਫੇਰ ਸੁਖ ਹੋਇਆ